ਲਿਓ ਲਿਓ ਕਰਤ ਫਰੇ ਸਭ ਲੋਗ ਤਾਂ ਕਾਰਨ ਵਿਆਪੇ ਬਹੁਤ ਹੋ ਗਏ ਲਿਓ ਕਰਤ ਫਰੇ ਸਭ ਲੋਗ ਸਾਰੇ ਕਹਿੰਦੇ ਨੇ ਮੈਂ ਪਾ ਲਿਆ ਮੈਂ ਪਾ ਲਿਆ ਮੈਂ ਪਾ ਲਿਆ ਲੈ ਲਿਆ ਤਾਂ ਹੀ ਮਹਾਪੁਰਸ਼ ਨੇ ਬਣੇ ਹੋਏ ਮਹਾਪੁਰਸ਼ੇ ਕਹਿੰਦੇ ਕਹੋਦੇ ਛੇਦੀਓ ਬਣ ਜੇ ਮੈਂ ਪਾ ਲਿਆ ਸਭ ਛੇਦੀਓ ਬਣ ਜੇ ਨੇ ਤਾ ਕਾਰਨ ਵਿਆਪੇ ਬਹੁਤ ਸ਼ੋਗ ਇਥੇ ਕਰਕੇ ਬਹੁਤੇ ਜਿਹੜੇ ਸ਼ੋਗ ਦੇ ਵਿਆਪ ਨੇ ਸੰਸਾਰ ਦੇ ਵਿੱਚ ਸ਼ੋਗ ਵਿਆਪਣ ਦਾ ਕਾਰਨ ਇਹ ਹੈ ਕਿ ਲੋਕ ਧਰਮ ਦੇ ਰੋਲ ਦੇ ਵਿੱਚ ਧਰਮ ਦੇ ਫੇਰ ਤੱਕ ਝੂਠ ਜਿਆਦਾ ਬੋਲਦੇ ਝੂਠ ਕਾਣ ਬੋਲਦੇ ਨੇ ਜਿਹੜੇ ਧਰਮ ਕਾਜ਼ੀ ਪੱਕੇ ਨਹੀਂ ਝੂਠੋ ਬੋਲਦੇ ਨੇ ਜਿਹੜੇ ਕੱਗੇ ਨੇ ਉਹ ਝੂਠ ਬੋਲਦੇ ਉਹ ਝੂਠ ਦਾ ਉਹਨਾਂ ਦਾ ਸੱਚ ਮੰਨ ਲੈਂਦੇ ਸਾਰੇ ਵਿੱਚ ਬਹੁਤ ਬੜੇ ਬੜੇ ਝੂਠ ਚੱਲਦੇ ਨੇ ਝੂਠ ਵੀ ਚੱਲਦੇ ਨੇ ਜਿਤਾਕੀ ਉਹ ਧਰਮ ਚੱਲਦਾ ਜੁਰੀਏ ਦੇ ਕਿਸੇ ਵੀ ਖੇਤਰ ਚ ਚੱਲ ਨਹੀਂਦਾ ਬੜੇ ਬੜੇ ਝੂਠ ਲਿਖਾਇਦੇ ਬੰਦਨ ਹਰੇ ਦਾ ਟਾੜੀ ਲਿਖਉਂਦੇ ਜੋ ਦਾ ਤੇ ਉਹ ਬੀਜੋਦੇ ਪਰ ਕੋਈ ਨਹੀਂ ਕਹਦਾ ਝੂਠ ਦਾ ਬਲੋ ਵੀ ਬਥੇਰੇ ਨੇ ਝੂਠ ਹੈ ਬਲੋਣ ਵਾਲੇ ਸੱਚ ਮੰਨਣ ਵਾਲੇ ਵੀ ਫਿਰ ਕਹਿਣ ਵਾਲੇ ਵੀ ਪਰ باوجود ਇਹਨੇ ਕਹਿਣ ਵਾਲਿਆਂ ਦੇ ਝੂਠ ਹੈ। ਖੈਰੀ ਲੋਕਾਂ ਨੇ ਗੁਲਤੀ। ਬੂਰਤੀ ਖੜੀ ਸੀ ਤਾਂ ਕਾਜ ਦੇ ਵਿੱਚ। ਬੁੱਧਾ ਸੀ ਜਿਹੜਾ ਆਪਣਾ ਸੋਵਨਾ ਦਾ। ਸੋਵਨਾ ਦੇ ਬੁੱਧਾ ਦੀ ਬੂਰਤੀ ਕਾਜ ਖੜੀ ਸੀ। ਉੱਪਰ ਵੀ ਵੈਗਨ ਸੀ। ਚੁੰਬਕ ਸੀ ਥੱਲੇ ਵਿੱਚੋਂ ਸੀ ਵਿਚਾਰੇ ਪਲੇਟ ਥੱਲੇ ਉੱਤੇ ਪਲੇਟ ਉੱਤੇ ਸੋਨਾ ਲਾਇਆ ਹੋਇਆ ਸੀ ਲੋਹੇ ਨੇ ਆਪਣੀ ਕਰਾਮਾਤ ਥੋੜੀ ਸੀ ਲੋ ਉਹ ਐਸੇ ਹਿਸਾਬ ਨਾਲ ਬੈਗਰਾਂ ਲਾਇਆ ਹੋਇਆ ਸੀ ਉਤਲੇ ਦੀ ਖਿੱਚ ਉੱਤੇ ਨੂੰ ਥੱਲੇ ਦੀ ਥੱਲੇ ਦੀ ਦੂਰ ਦੀ ਬਿਜਾੜੇ ਲੋਕ ਤਾਂ ਦੇਖਦੇ ਤੇ ਭਗਵਾਨ ਖੜਾ ਇਹ ਗਾਣੇ ਮਰਦਾ ਹੈ ਇਹੋ ਜਿਹਾ ਕੁਝ ਕਰਦੇ ਰਹੇ ਜਦ ਬਾਬਲ ਗੋਰੀ ਆਇਆ ਉਹ ਬੱਬੂ ਉਰਦੀ ਰਲੇਡੇ ਵੀ ਗੁੰਬਦ ਦੇ ਵੀ ਸੀਰੋ ਟੈਕ ਮੈਗਨ ਉਹ ਤਖਤਿਆਂ ਲਾ ਕੇ ਲੈ ਗਿਆ ਉਹੀ ਤਖਤਿਆਂ ਦੇ ਦਰਵਾਜ਼ਾ ਉਹਦੇ ਬੜੀ ਸੀ ਕੋਈ ਉਰਦੀ ਦੇ ਵਿੱਚ ਕੋਹੇ ਉਹ ਲੈ ਕੇ ਗਿਆ ਸੀ ਉੱਥੋਂ ਰਜੀਸ ਉਹ ਲੈ ਕੇ ਆਇਆ ਫਿਰ ਉੱਥੋਂ ਇਹ ਹੈਗਾ ਕੋਸ਼ਟਾ ਤਰ ਦੇ ਵਿੱਚ ਉਦਾਰੇ ਹੁਣ ਵੀ ਹੋ ਰਿਹਾ ਇੱਦੋਂ ਵੀ ਜ਼ਿਆਦਾ ਹੋ ਰਿਹਾ ਰੋਜੂ ਰੋਜ਼ੜਿਆ ਹੋ ਗਿਆ ਜੀ ਹੋ ਗਿਆ ਫਰੰਡਾ ਹੋ ਗਿਆ ਰੋਜ਼ ਝੂਠ ਬਾਜ ਆ ਗਿਆ ਆ ਗਿਆ ਰੋਜ਼ ਕਿੰਨਾ ਝੂਠ ਬੋਲੇ ਫਰੇਮ ਕੀਤਾ ਜਾਂਦਾ ਧਰਮ ਦੇ ਰੋਟੇ ਲੋਕ ਬੁਰੇ ਫੇਰ ਬੁਢੀ ਜਾਂਦੇ ਕਿ ਜਦੋਂ ਸ਼ਬਦ ਪੈਦੀ ਹੋ ਜੀ ਜਿੰਨਾ ਧਰਮ ਦੇ ਨਾਂ ਦੇ ਫਰਾਡ ਹੁੰਦਾ ਹੈ ਕੋਈ ਦੁਕਾਨਦਾਰ ਕਰ ਲੈ ਫਰਾਡ ਇੱਕ ਵਾਰ ਪਤਾ ਲੱਗ ਜਾਵੇ ਦੁਕਾਨ ਫੇਲ ਹੋ ਇਹ ਨਹੀਂ ਗਰੂ ਦੇ ਇਹ ਕੰਨ ਦੀ ਬੇਲੋਂ ਦੀ ਜਦੋਂ ਇਹ ਦੋਹਰਾਉਂਦੇ ਅਧਿਵਿਸ਼ਵਾਸ ਹੈ ਗੁਰਬਾਣੀ ਅਧਿਵਿਸ਼ਵਾਸ ਦੇ ਖਿਲਾਫ ਹੈ ਅਧਿਵਿਸ਼ਵਾਸਾਂ ਦੇ ਛੱਟ ਮਾਰਦੀ ਹੈ ਇਸ ਦਾ ਜਦ ਗੁਰਬਾਣੀ ਦੇ ਪ੍ਰਗਟ ਹੁੰਦੀ ਹੈ ਨਾ ਜਿਹੜੇ ਕਰਦੇ ਨੇ ਉਹਨਾਂ ਦੇ ਸਾਰੇ ਵੈਰੀ ਵੱਢ ਜਾਂਦੇ ਨੇ ਸਤਿਵਿਸ਼ਵਾਸੀ ਇਹ ਤਾਂ ਸਾਡੀ ਉਤਕਾੜ ਬੰਦ ਕਰਦੀ ਹੈ ਇਹ ਕਾਰਨ ਸੀ ਅਨੰਦਵਰ ਸਾਹਿਬ ਨੇ ਕਹਿ ਲਿਆ ਕਿ ਕਾਰਨ ਦੇ ਪੰਜਵੇਂ ਪਾਸ਼ਾ ਨੂੰ ਸਤੀ ਡਵੀ ਤੇ ਪੇਠਾਉਣਾ ਇਹ ਕਾਰਨ ਸੀ ਨੌਵੇਂ ਪਾਸ਼ਾ ਦੀ ਛੇਦੀ ਦਾ ਕਾਰਨ ਸੀ ਲਖਮੀ ਵਰਸੋਂ ਜੋਲ ਲਾਵੇ ਸੋਗ ਮਿਟੇ ਸਭ ਹੀ ਸੁਖ ਪਾਵੇ ਤੇ ਲਖ ਵੀ ਵਾਰ ਹੈ ਲੱਖ ਨੂੰ ਲక్ష్ਮੀ ਕਹਿੰਦੇ ਨੇ ਲక్ష్ਮੀ ਦਾ ਮਤਲਬ ਵੀ ਹੁੰਦਾ ਟਾਰਗੇਟ ਲੱਖ ਦਾ ਕੀ ਮਤਲਬ ਟਾਰਗੇਟ ਹੁੰਦਾ ਦਾ ਬਨ ਬੇਰਾ ਤੋਂ ਲੱਖ ਲੱਖ ਜੋ ਮੈਂ ਦੇਖੇ ਜੋ ਮੈਂ ਦੇਖਣਾ ਹੈ ਲਖਮੀ ਵਾਲਾ ਜੋ ਮੈਂ ਦੇਖਣਾ ਲਖਵੀ ਦਾ ਮਤਲਬ ਮੇਰਾ ਲਖੀਆ ਮੇਰਾ ਡਾਗੜਕੀ ਹੈ ਉਹ ਆ ਉਹ ਜੋ ਬਰਜੀ ਬਰੋੜ ਸਾਡਾ ਆਤੇ ਨੇ ਲਖਵੀ ਛੇਦੌਦ ਦੇ ਗੁਰਬਖ ਫਿਰਤਾ ਯਾਦ ਕਰ ਲੈਦੇ ਤੇ ਵਿਦਵਾਨਾਂ ਦੇ ਵਾਸੀ ਕਿਥੇ ਵਿਦਵਾਨ ਉੱਡੀ ਹੀ ਨੁੰਦਰ ਉਹ ਜਗਾ ਜਗਾ ਇਹ ਕਹਿਦਾ ਰਹੂਗਾ ਉਹ ਸਾਹਤ ਕਰਦਾ ਸੀ ਵਿਦਵਾਨਾਂ ਨੂੰ ਜਿਹਨਾਂ ਨੇ ਰੌਲਾ ਪਾਇਆ ਸੀ ਹੁਣ ਸਾਹਤ ਕਰਦਾ ਵਿਦਵਾਨਾਂ ਨੂੰ बुद्धि हीद ऐना हीर होके टिपड़ी कर दंदरे <laughs> बुद्धि हीर करके टिपड़ी ने कर दंदरे बुद्धिमान टिपड़ियां दी कर दंदरे ग्रंथा ते जेती समझ के रखते हुंदे रे सब जणू चिर लाउदे रे जे बेवकूफी रा कालोवे रा खड़ा चढ़णा कोया जंदा